ਜਾਂਦੇ ਨਾ ਫਰੀਦਾ ਇਹ ਚਿੰਤ ਘਟੋਲਾ ਵਾਣ ਦੁਖ ਬਿਰਹੋਂ ਵਿਚਾਣ ਲੇਖ ਮੈਂ ਲੇਖ ਵਿਖਾਇਆ ਬਿਨੇ ਹੁੰਦਾ ਵਾਹ ਵਾਹ ਮੇਰੇ ਅੱਗੇ ਇਹ ਮਹਾਰਾ ਜੀਵਣਾ ਤੂੰ ਇਹ ਜੀਵਣਾ ਮੇਰਾ ਵੇਖ ਮੇਰੇ ਸ਼ਾਇਰ ਸੱਚਿਆ ਤੇ ਫਿਰ ਇਹ ਤਖਾਂ ਤਾਨਾ ਮਾਰਦੇ ਜਾਂਦੇ ਫਰੀਦਾ ਬਾਹਰ ਪਰਾਇ ਬੈਸਣਾ ਕਹੀਂ ਮੁਝੇ ਨਾ ਦੇ ਮੈਂ ਤੇਰਾ ਬੂਏ ਤੋਂ ਨੰਕਾ ਤੇਰਾ ਪੂਆ ਛੱਡ ਕੇ ਹੋਰ ਕਹੇ ਤੇ ਬੂਏ ਜੇ ਤੂੰ ਇਵੇਂ ਰੱਖੀ ਤਾਂ ਜੀ ਸਰੀਰੋ ਲੈ ਮੇਰਾ ਸਰੀਰ ਕਿਉਂ ਜੋ ਕੁਝ ਬੋਲਣ ਵਾਲੀ ਛੇ ਕੱਢ ਛੱਡ ਮੈਨੂੰ ਇਸ ਤਰ੍ਹਾਂ ਨਾ ਰੱਖ ਤੇ ਫਿਰ ਆਂਦਾ ਆ ਬਿਰਿਉਂ ਦਾ ਲੇਫੂ ਵਿਛਾ ਕੇ ਪੈ ਗਿਆ ਮੇਰਾ ਹਾਲ ਵੇਖ ਓ ਜੀ ਬਿਰਿਉਂ ਇਨੋਂ ਅਰਜੀ ਕੀਤੀ ਆ ਇਹ ہمارا ਗੀਣਾ ਤੂੰ ਸਹਬ ਸੱਚੇ ਵੇਖ ਕਦੀ ਉਦਣ ਸਾਡੇ ਤੇ ਦਿਵਾਲੀ ਐਹੋ ਜਿਹਾ ਦਿਨ ਸੀ ਥੋੜੇ ਜਿਹਰਸਾ ਪਿੱਛੇ ਇਹਦੇ ਤੂੰ ਬਾਬੇ ਜਿਉਂ ਸੂਣੀ ਖਰੀਆਲੀ ਆਲੇ ਬਾਹਰ ਇਸ਼ਨਾਨ ਕਰਨ ਦਾ ਤੇ ਇਸ਼ਨਾਨ ਕਰਦਿਆਂ ਕਰਦਿਆਂ ਅੰਦਰੋਂ ਹੂਕ ਸਤਿਗੁਰੂ ਰਾਮ ਸੂਣਾ ਨਾਂ ਲਿਕੇ ਉੱਚੀ ਉੱਚੀ ਰੋਂਦਾ ਵੇ ਤੇ ਬਰਨਉਂਦੇ ਨੌਂਦੇ ਆਂਦੇ ਕੀ ਬਤਾ ਤੂੰ ਕਿੱਥੇ ਬੈਠਾ ਏ ਐਵੇਂ ਹੀ ਤਰੇ ਵਯੋਗ ਜਿੱਥੇ ਰੋਂਦੇ ਤੁਰੇ ਫਿਰਦੇ ਆ ਤੇਰਾ ਤਾਂ ਆਂਂ ਦੇ ਮੈਂ ਜਾਣਾਂ ਜੇ ਕਦੀ ਸਾਨੂੰ ਦੁੱਖ ਸੁੱਖ ਪੁੱਛੇ ਆ ਕੇ ਤੇ ਮੈਂ ਇੱਥੇ ਬੈਠਾ ਕੀ ਜਾਨਾਂ ਜਦੇ ਇਸ਼ਨਾਨ ਕਰਨੋਂ ਬਾਹਰ ਨਹੀਂ ਨਿਕਲਿਆ ਤੇ ਸਤਿਗੁਰੂ ਰਾਮ ਮਹਾਰਾਜ ਕੰਡੇ ਤੇ ਖਲੋਤੇ ਐਉਂ ਕਰਕੇ ਉੱਤੇ ਜਾਦਨ ਦਾ ਝੰਬ ਵੱਜਾ ਤੇ ਫਿਰ ਬਾਬੇ ਜੀ ਨੂੰ ਬਾਹਰ ਇਸ਼ਨਾਨ ਕਰਦਿਆਂ ਕਰਦਿਆਂ ਉਦੋਂ ਹੀ ਜਦੋਂ ਬਾਹਰਲੇ ਟੱਕਿਆ ਦੇ ਸੱਚੇ ਬਾਦਸ਼ਾਹ ਖਲੋਤੇ ਆ ਤੇ ਆਂਦੇ ਓ ਜੂਣੀਆਂ ਨਾਂ ਬੇਰਮ ਕਰਿਆ ਕਰ ਓਥੇ ਬੈਠੇ ਇਸ਼ਨਾਨ ਕਰਨ ਗਏ ਹਾਂ ਜਦੋਂ ਤੇਰੀ ਹੂ ਕੱਪੜੀ ਆ ਹਿੰਮਤ ਨਹੀਂ ਪਈ ਕਸ਼ੇਰਾ ਬਦਲ ਕੇ ਚਲਾ ਜਾਵਾਂ ਬਾਬੇ ਜੀ ਨੂੰ ਸੁਣੀ ਆਂਦੇ ਵਾਲੇ ਤੇਰਾ ਵਰਗਾ ਕੋਈ ਹੋੜ ਹੋਇਆ ਤੈਨੂੰ ਵੇਖ ਕੇ ਮੈਝੂ ਲਿਆ ਕਰਾਂ तेरे वर्गा है नहीं कोई ਜਿਹਨੂੰ ਵੇਖ ਲਈਏ ਤੇਰੇ ਵਰਗਾ ਤੂੰ ਹੀ ਹੈ ਤੈਨੂੰ ਨਾ ਆਖੀਆ ਤੇ ਕਿਨੂੰ